ਨਿਰਚਕ ਕੋ ਜਵਾਲਨ ਹਾਰ ਭੁੱਖੇ ਕੋ ਦੇਵਤ ਆਧਾਰ ਨਿਰਚਕ ਕੋ ਜਵਾਲਨ ਹਾਰ ਫਿਰ ਤਕੋ ਹੁੰਦਾ ੁਰੂਪ ਜਿਹਾ ਕਰ ਦਦਾ ਹੈ ਜਵਾਲਨ ਹਾਰ ਫਿਰ ਤਕ ਕੀ ਹੈ ਤਕ ਮਰੇ ਹਦਾ ਨੋ ਹੈ ਤਕ ਮਰੇ ਹਲ ਨੋ ਨਹੀਂ ਕਹਤੇ ਆ ਸਰੀਰ ਪਿੰਡ ਹੈ ਜੇ ਤਾਂ ਇਹ ਆਤਮਾ ਹੈ ਸਭ ਜੀਵਤ ਹੈ ਆਤਮਾ ਦੀ ਜਿਹੜਾ ਜਨਮ ਲੱਗਦਾ ਮਿਰਤਕ ਪਿੰਡ ਨਹੀਂ ਕਰੀ ਇਹਨੇ ਮਿਰਤਕ ਪਿੰਡ ਹੀ ਹੈ ਇਹ ਜਿਹੜਾ ਪਿੰਡ ਹੈ ਇਹਨੂੰ ਜਿੰਦਾ ਕੰਮ ਕਰਦਾ ਆਤਮਾ ਕਰਦੀ ਹੈ ਮਿਰਤਕ ਉਹ ਜਿਵੇਂ ਕੋਣ ਆਤਮਾ ਹੀ ਹੈ ਉਹ ਰੱਖਿਆ ਹੋਇਆ ਜਿੰਦਾ ਰੱਖਿਆ ਹੋਇਆ ਮਿਰਤਕ ਰੱਖਿਆ ਹੋਇਆ तू ਮਰਤਕੋ ਜਿਵਾਲਨ ਆਦਾ ਤੂੰ ਕੀ ਨੂੰ ਪੁੱਛਦਾ ਹੈ ਉਹ ਮਰਤਕੋ ਜਿਵਾਲਨ ਆਤਾ ਤੂੰ ਹੀ ਐ ਕੀਲੇ ਤੂੰ ਥੱਜਤਾ ਨੂੰ ਤੁਰਿਆ ਫਿਰਦਾ ਪਿੱਛੇ ਪਿੱਛੇ ਫੰਦਤਾ ਬਾਗਲ ਬਣਾ ਸਕਦੇ ਨੇ ਬਾਹਰ ਛੱਡਦੇ ਨੇ ਡਿਪਰੈਸ਼ਨ ਕਰ ਸਕਦੇ ਨੇ ਮਰਤਕੋ ਜਿਵਾਲਨ ਆਤਾ ਤੂੰ ਆਪ ਹੀ ਹੋਏ ਇਦੋਂ ਵੱਡੀ ਤਾਂ ਪਾਵਰ ਹਾਂ ਜਿਹੜੇ ਮਰਤਕੋ ਜਿਵਾਲਨ ਹਾਰੋ ਤੇਰਾ ਮੂਲ ਹੈ ਭੁੱਖੇ ਕੋ ਦੇ ਨੂੰ ਅਧਾਰ ਭੁੱਖੇ ਕੋ ਅਧਾਰ ਦੇਣ ਵਾਲਾ ਭੁੱਖੇ ਕੋ ਅਧਾਰ ਦੇਣ ਵਾਲਾ ਇਹ ਗੁਰਬਾਣੀ ਭੁੱਖੇ ਨੂੰ ਅਧਾਰ ਦੇਂਦੀ ਉਹ ਭੁੱਖੇ ਨੂੰ ਅਧਾਰ ਵੀ ਜੀਵ ਜੀਵਨ ਨੂੰ ਅਧਾਰ ਵੀ ਦਿੰਦੈਂ ਭੁੱਖੇ ਨੂੰ ਜੀਵ ਜਿਹੜੇ ਨੇ ਦੇਖੋ ਨਾ ਚੋਗਾ ਗਾਜ਼ਰ ਦੇ ਜਾਨ ਬੜੋ ਬੱਚਿਆਂ ਨੂੰ ਭੁੱਖੇ ਰੋਦਾ ਦੇ ਅੰਦਰ ਮਾਂ ਮਾਂ ਦੁੱਧ ਪਲਾਉਂਦੀਆਂ ਨੇ ਫਿਰ ਬੜਾ ਹੋਇਆ ਕੋਈ ਰੋਟੀ ਪੁੱਛ ਪਾ ਦਿੰਦਾ ਕੋਈ ਚਮਚਾ ਪਾ ਦਿੰਦਾ ਅਜਾ ਦੁੱਧ ਹੀ ਹੈ ਮਾਨ ਕਰਕੇ ਭੁੱਖੇ ਨੂੰ ਆਜ਼ਾਦ ਜਾਂਦਾ ਡਾਰ ਚਾਹੇ ਪਰਮੇਸ਼ਰ ਦੰਦਾ ਪਰ ਵਰਗ ਰੂਪ ਦਾ ਇਹ ਵੀ ਪ੍ਰਖਟਾ ਹੈ ਵੀ ਇਹ ਜੇ ਮਹਾਪੁਰਖੀ ਦਾ ਪ੍ਰਖਟਾ ਹੈ ਉਹ ਇਹ ਕਰਾਉਦਾ ਹੋਇਆ ਕਰਦਾ ਤਾਂ ਇਹੀ ਹੈ ਦੇਵਤ ਇਹ ਹੈ ਦੌੜ ਵਾਲਾ ਉਹ ਹੈ ਦੇਵਤ ਨੂੰ ਤਾਂ ਕਹਿੰਦੇ ਨੇ ਦੌ ਦਾ ਜੋ ਉਹ ਆ ਤਾਂ ਤਾਂ ਫਿਰ ਵੀ ਅਸੀਂ ਉਸੇ ਨੂੰ ਮੰਨਦੇ ਹੂ ਖੇ ਕੋ ਦੇਵਤ ਅਹਾਰ ਜਾ ਕੀ ਦ੍ਰਿਸ਼ਟੀ ਪੂਰਨ ਬ੍ਰਹਮ ਦੀ ਜਿਹੜੀ ਪੂਰਨ ਬ੍ਰਹਮ ਆਪ ਹੁੰਦਾ ਸਰਬ ਜਿਹੜੇ ਵਿਧਾਨ ਇਹਦੀ ਦੇਸ਼ੀ ਦੇ ਵਿੱਚ ਹੁੰਦੇ ਸਰਵਨ ਦਾ ਆਨ ਜਾ ਕੇ ਰਿਸ਼ਮ ਇੱਕ ਕਿਵੇਂ ਕਾਢ ਹੋਇਆ ਦ੍ਰਿਸ਼ਮਾਇਂ ਕਿ ਮੈਨੂੰ ਪਤਾ ਲੱਗਿਆ ਕਹਿੰਦੇ ਸਰਵਨ ਦਾ ਆਨ ਦਸ ਅਸ਼ਟ ਸਿਧਾਂਤ ਠਾਕਰ ਕਰਤਲ ਸਰੀਆ ਸੱਜਣ ਦੇ ਵਿੱਚ ਮਹਾਦੇਵ ਦੀ ਦੇਸੀ ਦੇ ਵਿੱਚ ਹੀ ਨੇ ਹੁਕਮ ਦੇ ਵਿੱਚ ਨਹੀਂ ਉਹਨਾਂ ਦੇ ਹੁਕਮਾਂ ਵਿੱਚ ਸਭ ਕੁਝ ਸਰਵਨ ਦਾ ਜਾ ਕੇ ਦ੍ਰਿਸ਼ਮਾਇਂ ਉਹ ਮਹਾਪੁਰਖ ਨੇ ਇਹ ਪੁਰਖਾ ਫਰ ਕਹਿੰਦਾ ਹੀ ਆਂ ਉਹ ਤੇਰੇ ਵੀ ਹੋ ਜਾਣਗੇ ਤੂੰ ਗਾਹਾਂ ਕਾ ਚੱਲ ਉਧਰੋਂ ਚੱਲ ਟਾਰਗੇਟ ਕੀ ਹੈ ਸਾਡਾ ਟਾਰਗੇਟ ਸਾਡਾ ਹੈ ਪੂਰਨ ਵਿਰਭਦ ਜੇ ਨਾ ਸੁਣੋਂ ਜਦੋਂ ਇੱਕ ਹੋ ਕੇ ਉੱਗਦਾ ਹੈ ਸਾਡਾ ਪੁਰਖਾ ਜਿੰਨਾ ਚਿਰ ਇੱਕ ਹੁੰਦਾ ਇਹ ਪੁਰਖ ਇੱਕ ਹੋਇਆ ਹੋਇਆ ਵੀ ਪੁਰਖਾ ਬੁਲਾਇਆ ਬੋਲਦਾ ਹੈ ਜੇ ਪੁਰਖਾ ਮਹਾਪੁਰਖ ਨਹੀਂ ਹੈ ਜਿੱਦਾਂ ਜਦ ਬਲਾ ਉਹਨਾਂ ਦੇ ਪੁਰਖ ਮਹਾਪੁਰਖ ਨਹੀਂ ਨੇ ਜਾ ਕੇ ਉੱਥੇ ਜਾ ਕੇ ਸਾਥਖੰਡ ਦੇ ਵਿੱਚ ਜਾ ਕੇ ਬੋਲਣ ਲਈ ਜਾਂਦਾ ਹੈ ਫਿਰ ਮਹਾਪੁਰਖ ਸਾਰੇ ਹੀ ਰਹੋ ਮਹਾਪੁਰਖ ਵਿੱਚ ਹੁਕਮ ਜੀ ਦੇ ਅੰਦਰ ਸਾਰੇ ਪੁਰਖ ਤੇ ਉਹ ਆਹ ਹੈ ਹੁਕਮ ਹੁਕਮ ਅੰਦਰ ਹੁਕਮ ਦਾ ਹੁਕਮ ਹੋਇਆ ਨਾ ਮਹਾਪੁਰਖੋ ਹੁਕਮ ਹੋਇਆ ਸ਼ਬਦ ਹੋਇਆ ਗੁਰੂ ਸ਼ਬਦ ਗੁਰੂ ਉਹ ਮਹਾਪੁਰਖ ਹੋਇਆ ਜਦੋਂ ਸ਼ਬਦ ਨਹੀਂ ਹੁੰਦਾ ਤਾਂ ਸਾਰੇ ਪੁਰਖੇ ਪੁਰਖ ਨੇ ਬਰਬਦਰ ਸਾਰੇ ਧਰਮ ਦਾ ਆਉਣ ਜਾਣ ਇੱਕ ਬਚਨ ਮਹਾਪੁਰਖ ਵੀ ਆ ਗਿਆ ਉਹ ਸਤਖੰਡ ਦੇ ਵਿੱਚ ਐਸੋ ਮਹਾਪੁਰਖ ਨੇ ਆ वाणी महापुरुषन की आयो वाणी तो बहुत है महापुरुषन का ता महापुरुषन आया हां जी धर्मन आ जाकी दृष्टि वाणी धर्मन जान जाकी तेश्मा है पूर्व लिखे का रहना पावे और भी लिखेगा लदा पर प्राप्त जो पूर्व लिखया था पहला जो मने जी ने नाम चलया सी भी नाम लेने में का बिल्ला तो बहुत लेट है 10वी पास तो 10वी साल से जाके कीती है और जिस पढने लगया सी तो पास करने वास्ते लगया सी हो सकता एमए करने वास्ते लगया हो हो सकता है, hmm. है कोई उदो भी बड़ी डिग्री डॉक्टर बनने वकील बनने वास्ते लगया हो तो फिर बड़ा बनता है तोड़ा ना लेके तो उदो ही आके चलया ਤਦ ਕੂਲ ਦਾਖਲਾ ਲਿਆ ਜੁੱਤੋਂ ਲੈ ਕੇ ਚੱਲਿਆ ਸੀ ਆਸ ਪੂਰਬ ਦੇਖਦਾ ਉਹ ਵਹੀ ਪ੍ਰਾਪਤ ਕੀਤਾ ਜੇ ਤੂੰ ਪਾਸੇ ਹੋਇਆ ਸਭ ਕੀ ਚਾਗੂ ਕੀ ਚੀਜ਼ ਉਸ ਦਾ ਉਹ ਨੂੰ ਦਾ ਕਰਨੇ ਜੋ ਤੁਹਾਨੂੰ ਪੁੱਛੂ ਕਿਸ ਤਾ ਉਹ ਯੋਗ ਕੌਣ ਹੁੰਦਾ ਜਿਹੜਾ ਪੂਰਨ ਬ੍ਰਹਮਾ ਕਰਜੋਗ ਹੈ ਉਹ ਬਿਨਾਂ ਸਰੀਰ ਤੇ ਕਰਨ ਜੋਗ ਹੈ ਇਹ ਜਿਹੜਾ ਸਰੀਰ ਤੇ ਬਿਨਾਂ ਕੁਝ ਕਰਨ ਜੋਗ ਨਹੀਂ ਸਰੀਰ ਨਾਲ ਕੁਝ ਕਰਨ ਜੋਗ ਹੈ ਜਿਹੜੇ ਗੁੰਗਲੇ ਆ ਨਾ ਬਿਨਾਂ ਸਰੀਰ ਤੇ ਕੁਝ ਕਰਨ ਜੋਗ ਵਾਲਾ ਉਹੀ ਗੁੰਗਲੇ ਆਗਾ ਕੋੜ ਸਰੀਰ ਨਾਲ ਦਾ ਕੁਝ ਕਰ ਸਕਦਾ ਮੇਰਾ ਜੀਦ ਤੱਕ ਕਰ ਸਕਦਾ ਕੋੜ ਬੰ ਆਪਣੀ ਇੱਛਾ ਵਧਾ ਕੇ ਕੁਝ ਕਰ ਸਕਦਾ ਜੋ ਚਾਹੁੰਦਾ ਉਹ ਹੋ ਜਾਂਦਾ ਅਸੀਂ ਜੋ ਚਾਹਨੇ ਹਾਂ ਉਹ ਹੀ ਆਈਓ ਚਾਹਨੇ ਆ ਸਰੀਰ ਨਾਲ ਜੋ ਹੋ ਜੇ ਹੋ ਗਿਆ ਤਾਂ ਅਸੀਂ ਸਮਝਦੇ ਆਂ ਵੀ ਸਾਡੀ ਅਸੀਂ ਚਾਹੁੰਦੇ ਦੀ ਕਰ ਲਿਆ ਪਰ ਸਭ ਕੁਝ ਉਹ ਸਾਡੀ ਇੱਛਾ ਵਧਾ ਵੀ ਅਸੀਂ ਸਰੀਰ ਨਾਲ ਇਹਨਾਂ ਲੋਕ ਨੂੰ ਕਹਿੰਉਂਗਾ ਜੀ ਸਤਿਗੁਰੂ ਪਰੂਪਰਾ ਕੋ ਗ੍ਰਿਠਾ ਜਨਨ ਹਾਰ ਜਾ ਕੇ ਖਨੂਦਰੀ ਲਾਂਦ ਵਿੱਚ ਪਿਆਰ ਉਹ ਦਰੋਗ ਜਿਆ ਕੇ ਜਬੇ ਪ੍ਰਭੂ ਦੀ ਨਹੀਂ ਚੱਲ ਰਹੀ ਕਲਾ ਉਹਦੇ ਵਿੱਚ ਹੀ ਹੈ ਸਾਰੀ ਕਬੀ ਕਿੱਥੇ ਹੈ ਕਬੀ ਸਿਰ ਤੇ ਵੀ ਬੁਖਾਰ ਹੈ ਤੁਹਾਡਾ ਆਦਮੀ ਤੁਹਾਡਾ ਕਭ ਠੀਕ ਕਰ ਸਕਦਾ ਵਾਰਾਦੂ ਤੁਸਾ ਰੋਦੇ ਕੇ ਠਾਲੀ ਦਾ ਪੁਰੂ ਕਲਾਸ ਲਾ ਕੇ ਪਲਾਈਦਾ ਤਦ ਰੁਸ ਹੋ ਜਾਂਦਾ ਪੀਣ ਲੱਗ ਜਾਂਦਾ ਉਹ ਵੀ ਉਹ ਤੂਕਾ ਮਿਲ ਜਾਂਦਾ ਐਨਾ ਕੇ ਵਰਤਾ ਕੋਈ ਜ਼ਿਆਦਾ ਫਰਕ ਨਹੀਂ ਪਰਾਪਦਾ ਧਰਮ ਕਲਾ ਭਰਪੂਰ ਪ੍ਰਭ ਦੇ ਨਾਲ ਆਇਆ ਹੈ ਜੀਵੇ ਦਾ ਨਾਲ ਸਾਹਿਬ ਨੇ ਕਿਹਾ ਵੀ ਇਹ ਤਲ ਵਿਰਤ ਕੋਈ ਵਾਲਨ ਹਾਰ ਹੈ ਰਬਿਆ ਆਪੇ ਪ੍ਰਭ ਹੈ ਹਾਰ ਹੈ ਪਰਟਿੰਗ ਦਾ ਪੁੱਤਰਾ ਕੈਸੇ ਦੁੱਜਾ ਹੈ ਇਹਦੇ ਕਰਕੇ ਹੀ ਨਹੀਂ ਜਾਇਦਾ ਨਾ ਹਾਂ ਸਮਨ ਦੇ ਚੁੱਤ ਦਾ ਅਸਲ ਗਿਆਨ ਨਹੀਂ ਹੈ ਕਿ ਤੂੰ ਕੀ ਹੈ ਜਦੋਂ ਨੂੰ ਆਪਣਾ ਗਿਆਨ ਹੋ ਗਿਆ ਤੂੰ ਕੀ ਹੈ ਫਿਰ ਤਾਂ ਤੂੰ ਆ ਕੋਈ ਰਹਿਣ ਨਹੀਂ ਇਹਦੇ ਹੀ ਸਮਨ ਜਾ ਕੇ ਸਮਨ ਵੀ ਟੈਟੋ ਵੱਡੀ ਪਾਵਰ ਨਹੀਂ ਹੈ ਕਿਤੇ ਹਜਰਤ ਨਾਲੇ ਬਰਾਬਰ ਦੀ ਪਾਵਰ ਵਾਲੇ ਨੇ ਕੋਈ ਵੀ ਵੀਡੀਓ ਬਾਬਰ ਤੇਰੇ ਕੋਲੋਂ ਬਣ ਜਾਇਆ ਹੈ ਨਾ ਮੈਂ ਦੱਸ ਕੌਣ ਇਹਨੂੰ ਬਣਾਉਣ ਵਾਲਾ ਹੈ ਇਹ ਪੀਪਾ ਬਾਬਰ ਨਾਲ ਹੁਣ ਤਾਂ ਵਾਲਾ ਜਾਂ ਛੜਕੀ ਤੋਂ ਦਾ ਬੰਨਾ ਭੇਜਦਾ ਇਹਨੂੰ ਕੋਈ ਨਹੀਂ ਬਣਾਉਂਦਾ ਵੀਡੀਓ ਹੁਣ ਵੀ ਇਹਦੇ ਕੋਲੇ ਆ ਪਰ ਇਹ ਨੂੰ ਇਹ ਨੂੰ ਦਲੀਲਾਂ ਦੇ ਕੇ ਦੱਸਿਆ ਵੀ ਇਹ ਨਹੀਂ ਬੰਦੇ ਨਾਲ ਨੁਕਸਾਨ ਤੇ ਰਹੀ ਸਮਝਾਇਆ ਹੀ ਹੈ ਵੇਨਾਲ ਤੇ ਸਮਝਾਉਂਦੇ ਨੇ ਭਾਈ ਤੁਸਾਂ ਤੇ ਰਹੀ ਹੈ ਸਿਹਤ ਹੈ ਤਮੂ ਤੇਰੀ ਪਾਵਰ ਘਟੀ ਹੋਈ ਹੈ ਤੇਰੀ ਸਿਹਤ ਇਸ ਤਰ੍ਹਾਂ ਦੂਸਰ ਹੋਣਾ ਨਾ ਹੋਵੇ ਇਸ ਤਰ੍ਹਾਂ ਦੂਸਰ ਹੋਣਾ ਨਾ ਹੋਵੇ ਉਹਦੇ ਬਿਨਾ ਦੁਆ ਕੋਈ ਨਹੀਂ ਹੈ ਫੂਲ ਬ੍ਰੰਤ ਬਿਨਾ ਹੋਰ ਕੋਈ ਹੋਇਆ ਇਸ ਵਿੱਚ ਜਿਹੜੇ ਸਾ ਆਪਣੇ ਆਪ ਨੂੰ ਕਹਿੰਦੇ ਨੇ ਗੁਰੂ ਬਣਦੇ ਨੇ ਉਹ ਬਿਲਕੁਲ ਇਹ ਗੱਲ ਸਾਰੰਦ ਕੀ ਕਹਾ ਜਿਹੜੇ ਤੇ ਵੀ ਦੇਵਤਿਆ ਹੋਰ ਬਣਾਈ ਬੈਠੇ ਨਾ ਹੋਣਾ ਨਾ ਹੋਊਗਾ ਉਹ ਬੰਦਾ Vishnu Shivji ਬਣਾਈ ਫਿਰਦੇ ਨੇ ਜਿਹੜੇ ਇਦਾਂ ਹੋ ਸਕਦੇ ਇਹ ਕੋਈ ਦੂਸਰਾ ਹੋਆ ਨਾ ਹੋ ਉਹ ਕਹਿੰਦੇ ਨੇ ਸਾਡਾ ਉਹ ਬਾਪੂ ਸਾਹਿਬ ਹੈ ਕੁਲ ਕੁਛ ਕਰਦਾ ਕੋਈ ਕੋਈ ਕਹਿੰਦੇ ਕਿ ਸਾਡੇ ਰ ਕੋਈ ਮਾਂ ਨਹੀਂ ਹੋ ਸਕਦਾ ਕੋਈ ਇੱਕੋ ਹੀ ਹੈ ਉਹ ਕੌਣ ਹੈ ਉਹਦਾ ਜਪਿਆ ਤੁਹਾਨੂੰ ਜਪਨਣ ਦੀ ਲੋੜ ਹੈ ਜਿਹਨੂੰ ਜਨਮਨਣ ਦੀ ਲੋੜ ਪਈ ਆ ਉਹਦੇ ਤਾਂ ਆਪਣੇ ਚ ਕੋਈ ਕਮੀ ਸੀ ਉਹ ਜਨਮ ਜਨਮ ਲਾਣਾ ਪਿਆ ਬਈ ਉਹ ਜਿਹਨੂੰ ਸੂਰੀ ਦੇ ਬੱਦਿਆ ਨੇ ਚੱਕੇ ਚੜਾਤਾ ਉਹਦੇ ਮਾਂ ਦਾ ਕੇ ਤੁਸੀਂ ਕੀ ਕਰੋਗੇ ਪਰ ਬਸਲਾ ਕਾ ਲੋਥਾ ਖੜਾ ਉਹਨੂੰ ਤਾਂ ਕਹਿੰਦੇ ਸੂਰੀ ਚੜਾਤਾ ਪੰਜਵੇਂ ਪਾਸ਼ਾ ਨੂੰ ਜੱਤੀ ਤੇ ਵੀ ਉਹ ਤਾਂ ਕਹਿੰਦਾ ਆਪਣੀ ਮਰਜ਼ੀ ਨਾਲ ਰਹਿੰਦੀ ਆ ਅੱਜ ਥੇ ਬਿਮਾਰੀ ਹੈ ਤੇ ਆਪਣੇ ਗੱਲ ਨੂੰ ਤਲਵਾਰ ਆਉਂਦੀ ਹੈ ਫਿਰ ਹੋਰ ਅਰਥ ਕਰਦੇ ਆ ਤੂੰ ਆਪਣਿਆਂ ਨੂੰ ਹੀ ਬਸਲਵਾ ਚਾਹੁੰਦੇ ਵੀ ਉਹ ਬਰਾਬਰ ਕੋਈ ਨਹੀਂ ਆਏਗਾ ਅੱਜ ہماری ਹੈ। ਨਾਲ ਵੀ ਹੋ ਜਾ। ਹੁਣ ਇਹ ਦੇਖਣਾ ਹੈ ਪਾਕਿਸਤਾਨੇ ਅਲਨਾਨਕ ਦੀ ਜਿਹੜੀ ਉਪਦੇਸ਼ ਹੈ ਉਹ ਕੀ ਫਰਕ ਹੈ ਉੱਥੇ ਵੈਲਿਊ ਬਣਦੀ। ਪਰ ਮੇ ਨੇ ਜੋ ਆਪਣੇ ਆਪ ਨੂੰ ਬਣਿਆ ਉਹ ਕੀ ਬਣਿਆ? ਈਸਾ ਨੇ ਆਪਣੇ ਆਪ ਨੂੰ ਕੀ ਬਣਿਆ? ਉਹਦੇ ਕਹਿ ਮਿਹਰਤੇ ਨੂੰ ਬੋਲ ਦਿਓ। ਤੇਰੇ ਤਾਂ ਲੈਂ ਗਿਆ ਮੋਰ। ਜਿਹਦੇ ਨਾਲ ਦੇ ਬਾਰਾ ਤੇਰਾ ਅਮਨੀ ਵੀ ਸਾਰੇ ਹੀ ਉਹ ਭੱਜ ਗਏ ਚਲੇ ਤੇ ਤੂੰ ਛੱਡ ਗਏ ਉਹਨਾਂ ਦਾ ਇਮਾਨ ਹੀ ਨਹੀਂ ਤੇਰੇ ਦੂਜੇ ਕੇ ਮੈ ਲਾਇਆ ਹੁਣ ਜਿਹਦੇ ਨਾਲ ਰਹੇ ਉਹ ਆਦਮੀਆਂ ਨੇ ਨਹੀਂ ਇਮਾਨ ਲਿਆ ਜਿਹੜੇ ਬਿਲਕੁਲ ਨਿਕਸ਼ਬਤੀ ਸੀ ਦੁਨੀਆਂ ਤੇ ਤੇ ਮੌਤ ਕਿੱਥੇ ਮਿਲਦਾ ਉਹਦੇ ਦਾ ਦਿਲ ਦਾ ਇਮਾਨ जिदे मुरे पना वाले कलाले सस्ते जिदे मुरे पना घड़ी दे भी, भी सी इदो भी सी ते असि होंगे तेनु नहीं ओड़ देना ओदे दे दा ਤੇ हो सकदी है पर ओ कहंदा मेरे, ले मेरे ले। दे दे ते लेयो इदो उते कहंदा नहीं वेले ओते असि कहंदे हां ओ कहंदा जिदे ते मैं रखी हटे कोई ते तू सी रखयो कोई तू तो कहंदा ही नहीं वो मेरे ने ਸਿਰਫ ਰੋਟੀਆਂ ਜਿਹਨਾਂ ਨੇ ਖਾਣੀਆਂ ਨੇ ਪਿੱਛੋਂ ਗਲਾਉਣੀਆਂ ਆ ਜਿਹੜੇ ਬਣਾਉਣੇ ਨੇ ਪਰਪੰਜ ਜਿਹਨਾਂ ਨੂੰ ਮਾਇਆ ਚਾਹੀਦੀ ਉਹਨਾਂ ਦੀ ਪ੍ਰਚਾਰ ਹੈ ਇਹ ਜੇ ਜੇ ਅਸੀਂ ਸਹੀ ਪ੍ਰਚਾਰ ਕਰੀਏ ਉਹਨਾਂ ਨੂੰ ਕੀ ਲਾਣ ਜਾਣਾ ਰੋਕਾ ਦੇ ਹਾਂ ਜਾਣਾ ਤਾਂ ਤੇ ਉੱਚ ਨਿਰਮਲ ਇਹ ਕਰਨੀ। ਕਿ ਆਪਾਂ ਜਪ ਜਨ ਸਦਾ ਸਦਾ ਜਨ ਰਹਿਣੀ। ਕਿ ਆਪ ਜਨ ਸਦਾ ਸਦਾ ਜਨ ਰਹਿਣੀ ਹੈ ਜਦ। ਫਿਰ ਗਿਆਨਵਾਨ ਜਨ ਗਿਆਨਵਾਨ ਨੂੰ ਕਹਿੰਦੇ। ਗਿਆਨਵਾਨ ਨੂੰ ਕਹੇ ਜਪ ਤੂੰ ਇਹਨੂੰ ਹੋਰ ਜਪ ਸਮਝ ਸਦਾ ਸਦਾ ਜਨ ਰਹਿਣੀ। ਸਦਾ ਸਦਾ ਜਪ ਜਨ ਰਹਿਣੀ ਦਿਨ ਰਾਤ ਕੀ ਜਪ। ਸਭ ਤੇ ਉਜ ਨਰਮਨ ਲਈ ਕਾਢੀ ਸਭ ਤੇ ਉਜ ਨਰਮਨ ਕਾਢੀ ਇਹ ਹੈ ਕਿ ਇਹ ਪਿੱਛੇ ਜਿਹੜੀ ਗੱਲ ਕਹੀ ਗਈ ਹੈ ਹਾਂ ਕਰੀ ਕਿ ਪਾਤ ਜਿਸ ਕੋ ਨਾਮ ਦਿਆ ਨਾਨਕ ਸੋ ਜਨ ਨਿਰਮਲ ਪਿਆ ਕਰੀ ਕਿਰਪਾ ਜਿਸ ਨਾਮ ਦਿਆ ਜੀ ਤੇਨੇ ਆਪਣੀ ਕਰਪਾ ਕੀਤੀ ਹੈ ਉਹਨ ਕੀ ਦਿੱਤਾ ਉਹ ਨਾਮ ਦਿੱਤਾ ਦੀਦੇ ਕਰਤਾ ਹੋਈ ਹੈ ਉਹਦੇ ਬੜਿਆ ਹੁਨਾਮ ਹੈ ਬੜਿਆ ਉਹ ਕਰਪਾ ਕਰੀ ਦਿੱਤਾ ਤੋਂ ਬੜਿਆ ਨਾ ਨੂੰ ਸੋ ਜਾਣਾ ਨਿਰਮਲ ਕੀਤਾ ਕਰੀ ਕੀ ਨਹੀਂ ਕਰਪਾ ਪਰਮੇਸ਼ਰ ਨੇ ਨਾਮ ਉਥੋਂ ਮਿਲਿਆ ਸੱਤ ਸੱਤਾ ਨੂੰ ਸੱਤਾ ਕਹਿੰਦੇ ਜੀ ਸੱਤਾ ਜੀ ਸਾਡੇ ਬਾਹਪੁਰਖਾਂ ਨਾਲ ਸਦਾ ਸਤਿ ਰੱਖ ਤੇ ਕਰਪਾ ਹੋਈ ਪਰਮੇਸ਼ਰ ਦੀ ਕਰਪਾ ਕੋਈ ਹੰਤ ਨਹੀਂ ਲੈਂਦਾ ਇਹਨਾਂ ਦੇ ਕਿਰਪਾ ਕਹਿ ਜੀ ਹੋਈ ਜੀ ਇਹਨਾਂ ਦੇ ਠੱਗੀ ਮਾਲ ਦੀ ਕਿਰਪਾ ਹੋਈ ਠੱਗ ਜੀ ਹੋ ਇਹਨਾਂ ਦੇ ਜਿਹੜੇ ਸੀ ਗੁਰੂ ਉਹ ਠੱਗ ਜੀ ਠੱਗੀ ਰਾਦੇ ਇਹਾਂ ਦੇ ਗੱਡੀਆਂ ਚੱਲਦੀਆਂ ਨੇ ਪੈਸਾ ਵਾਧੂਗਾ ਇਹਨਾਂ ਦੇ ਦਸਤੌਰ ਨੇ ਉਹਨਾਂ ਦੀ ਕਿਰਪਾ ਠੱਗੀ ਰਾਦੇ ਹੋ ਜਾਣਤਾ ਦੇਖੇ ਥੋੜਾ ਬੋਤਾ ਠੱਗੀ ਮਾੜਾ ਗਿਆ ਦੇ ਬਾਜਾਂ ਤੇ ਸਿਕਦਾਰਾ ਇੰਨਾ ਬੜਿਆ ਨਾ ਆ ਸਿਖਾ ਗਏ ਹਾਈ ਲੱਗੀ ਯਾਦਗਾਰ ਨਾਲ ਨਹੀਂ ਥਾ ਆ ਗੋਇਆ ਹੀ ਲਿਖਿਆ ਇਹਨਾਂ ਦੀ ਬੱਲੇ ਬੱਲੇ ਇਹਾਂ ਦੀ ਬੱਲੇ ਬੱਲੇ ਕਰਕੇ ਉਹਨਾਂ ਦਾ ਯਾਦ ਕਰਦੇ ਨੇ ਉਹਨਾਂ ਦੀ ਵਡਿਆਈ ਕਰਦੇ ਨੇ ਆ ਗੱਲ ਲੈ ਵਿੱਚੋਂ